ਇਕ ਓਅੰਕਾਰ ਵਾਹਿਗੁਰੂ ਜੀ ਪਤੈ ਸ੍ਰੀ ਪਉਤੀ ਜੀ ਸਾਹਿਬ ਪਾਤਸ਼ਾਹ ਬਾਲਮੀ ਪ੍ਰਤਮ ਪਉਤੀ ਸਿਮਗਾ ਅਿਸ਼ਗੁਣਾਂ ਕ ਲਈ ਤਾਏ ਰੰਗਤੈ ਗੁਰਮਦਾਸ RAMਦਾਸ ਅਰਜੁਨ ਹਰ ਗੋਬਿੰਦ ਨੂੰ ਗੁਰ ਸ੍ਰੀ ਹਰਿ ਰਾਏ ਸ੍ਰੀ ਹਰਿ ਕੀ ਨਿਤਿ ਆਏ ਜੁਠਿਆ ਸਭ ਜਾਏ ਤੇਗ ਬਹਾਦ ਅਸਾ ਸਿਮਰੀਏ ਕਰ ਨਾਨਕ ਦਾ ਵਾਤਾਏ ਦਸ ਪਾਸ਼ਾ ਸਿਗ ਗੂਣ ਸਿਮਰ ਪੰਦੇ ਵਾਰਿਸ ਸਤਨ ਸਤਗੁਰੂ ਬਾਲਕ ਸਿੰਘ ਜੀ ਸਿੰਘ ਜੀ ਤਰਨਦਾ ਮਾੜੀ ਦੀ ਗੱਬਤਾ ਹੈ ਅਕਾਲ ਪੁਰਖ ਪਤਿਤ ਪਾਪਨ ਸਤਿਗੁਰੂ RAM ਸਿੰਘ ਜੀ ਸਿੰਘ ਜੀ ਜਨ ਜਮਤ ਲਈ ਅਸ਼ੜਾਇ ਜੋਤ ਕੇ ਜਾਮਾ ਸ੍ਰੀ ਸਤਗੁਰੂ ਹਰੀ ਸਿੰਘ ਜੀ ਸਿੰਘ ਜੀ ਟੁੱਟੀ ਲਈ ਮਲਾਇ ਤੰਦਨ ਵੱਡੇ ਪ੍ਰਤਾਪ ਵਾਲੇ ਸੈ ਸਿਤ ਪ੍ਰਤਾਪ ਸਿੰਘ ਸੋਚ ਸੋ ਤੇ ਨਾਮ ਬਾਣ ਦਸਨ ਦਾ ਪਰਵਾਦ ਤਾ ਚਲਾਏ ਗਦੀ ਨਸ਼ੀਨ ਸਤਗੁਰੂ ਜਗਜੀਤ ਸਿੰਘ ਸਿੰਘ ਜੀ ਪਿਆਰੇ ਮਾਲਕਾਲ ਪੁਰਖ ਦੀਨabandu ਬੇਅੰਤ ਪਾਸ਼ਾ ਜਿਨ੍ਹਾਂ ਦੇ ਜਲ ਦਰਸ਼ਨ ਕੀਤੇ ਆਂ ਜਨਮ ਮਰਨ ਦੁੱਖ ਜਾਏ ਸਤਿਗੁਰੂ ਜੀ ਉਹ ਸਭ ਥਾਈ ਹੋਣੇ ਸਾਇ ਗੁਰੂ ਜੀ ਦੇ ਚਾਰ ਸਭਿਆ ਦੇ ਪੰਜ ਪਿਆਰੇ 40 ਮੁਕਤੇ 80 ਸ਼ਹੀਦ ਤੇ ਬਿਰਾਂਜੀਤ ਸਿੰਘ ਰਾਜ ਸਿੰਘ ਦੀਪ ਚੰਗਾ ਦੀ ਕਮਾਈ ਬਲ ਤੇ ਆਨ ਤਰਨਾਮ ਚਤਾਵੇ ਅਕਾਲ ਸੱਚੇ ਪਾਤਸ਼ਾਹ ਜੀ ਉਹ ਜੋ ਗੁਰੂ ਰੂਪ ਕੇ ਗ੍ਰੰਥ ਸਾਹਿਬ ਮੇ ਹੁਕਮ ਲਿਖੇ ਨੇ ਸਾਦਾ ਸਾੜ ਤੋਂ ਅਠੋ ਪੈਰ ਚਾਰ ਘੜੀ ਤੇਰਾ ਨਾਮ ਚ ਤਾਹਵੇ ਜਿੱਥੇ ਮੇਲਾ ਹੋਏ ਗੁਰਮਖਾਂ ਦਾ ਮੇਲਾ ਹੋਏ ਬੇਮਖਾਂ ਦੇ ਸੰਗ ਤੇ ਰੱਖ ਲੈਣਾ ਆਪਣੇ ਸਰਗਨ ਸਰੂਪ ਦੇ ਦਾਸਰੇ ਨੇ ਗਾਉ ਗਰੀਬ ਦੇ ਕਸ਼ਦੂ ਕਰਨੇ ਬੰਦੀ ਗਾਨੇ ਦੀ ਬੰਦ ਖਲਾਸ ਕਰਦੀ ਤਰਦੀ ਤਾਂ ਕਰਨਾ ਸੰਤ ਘਰ ਪ੍ਰਕਾਸ਼ ਕਰਨਾ ਸਾਡੀਆਂ ਅਨੇਕ ਬੋਲਾਂ ਹਨ ਨਾ ਵਿਸਰਨਾ ਨਾ ਵਿਸਾਰਨਾ ਕੁਲ ਸਿਸ਼ਟੀ ਤੇਰਾ ਨਾਮ ਜਬੇ ਦੁਖਿਆ ਰਹੇ ਨਾ ਕੋਈ ਸਤਗੁਰਾਂ ਸੱਚੇ ਬਾਦਸ਼ਾਹ ਜੀ ਉਹ ਇਹ ਕਾਲ ਤੋ ਦਿਨਵੰਦ ਸਤਗੁਰੂ ਜੀ ਇਸੇ ਸੱਚੇ ਬਾਦਸ਼ਾਹ ਜੀ ਉਹ ਆਪ ਜੀ ਦੀ ਪਿਆਰੀ ਸਾਧ ਸੰਗਤ ਨਿਕਤਰੋ ਕੇ ਆਪ ਦੇ ਬਖਸ਼ਿਸ਼ ਪਵਤਰ ਨਾਮ ਦਸਮਿਕਤਾ ਸਤ ਗੁਰਾਂ ਸਿ ਆਪ ਦੇ ਦਰਸ਼ਨ ਮਿਤ ਦਰਸ਼ਨ ਦੀ ਦਾਤ ਬਖਸ਼ੀ ਅੰਮ੍ਰਿਤ ਵੇਲੇ ਜਾਗਮ ਅਸ਼ਨਮ੍ਰਿਤ ਵੇਲੇ ਦਸੇਮ੍ਰਿਤ ਬਖਸ਼ਿਸ਼ ਅੰਮ੍ਰਿਤ ਇਸ਼ਨਾਨ ਬਖਸ਼ਣਾ ਸਾਈਂ ਕਾਰ ਕਰਾਏ ਜੋ ਕਰਕੇ ਤੇਰੀ ਦਰਗਾਹ ਵਿੱਚ ਸੁਰਖੋ ਕੇ ਆਈਏ ਸਤ ਸੱਚੇ ਪਾਤਸ਼ਾਹ ਜੀ ਹੋ ਇਹ ਸਤ ਗੁਰੂ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਔਟ ਆਪ ਦਾ ਸਾਰ ਲੈ ਕੇ ਆਪ ਦੀ ਸਾਧ ਸੰਗਤ ਗੁਰੂ ਸੱਚੇ ਪਾਤਸ਼ਾਹ ਜੀ ਹੋ ਤੇ ਸ਼ਬਦ ਕੀਰਤਨ ਕੀਤਾ ਗੁਰਮੁਖ ਸਾਹਿਬ ਆਸ਼ੇ ਰੱਗਿਆਂ ਨੇ ਅਖਰ ਲਾਗ ਬਾਦ ਘਾਟ ਪੁੱਲ ਜਿਹਾ ਨਾਗੇ ਤੋਂ ਸੁੱਧ ਤੇ ਸਪਸ਼ਟ ਪਾਣੀ ਪੰਡਾ ਬਾਦ ਬਖਸ਼ਣਾ ਗੁਰਮੁਖ ਸਾਹਿਬ ਸਾਜ ਜੋ ਇਸ ਬਾਣੀ ਦਾ ਭਾਵ ਸਾਡੇ ਮਨਾਂ ਤੇ ਵਸੇ ਜੁਗਾਹ ਪਰਜੰਤ ਜਿਹੜਾ ਜਸ ਕਰਦੇ ਅਕਾਲ ਪੁਰਖ ਦੀਨ ਸਤਿਗੁਰ ਜੀ ਆਓ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਅੱਜ ਦਾ ਪ੍ਰੋਗਰਾਮ ਗੁਰਮੁਖ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਸਿੰਘ ਸੋਨ ਤੇ ਪਰਿਵਾਰ ਵੱਲੋਂ ਉਹਨਾਂ ਨੇ ਆਪਣੇ ਪੋਤਰੇ ਰਾਜਪੀਰ ਦੀ ਜਾਤ ਵਿੱਚ ਕਰਵਾਇਆ ਗ੍ਰੀਮ ਆਸਤਿ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਨੂੰ ਗੁਰਸਿੱਖੀ ਜੀਵਨ ਬਖਸ਼ਣਾ ਕਿਰਪਾ ਕਰਨੀ ਮਿਹਰ ਕਰਨੀ ਆਪਣੇ ਚਰਨਾਂ ਦਾ ਆਸਰਾ ਬਖਸ਼ਣਾ ਗ੍ਰੀਮ ਆਸਤਿ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਮਿਹਰ ਕਰਨੀ ਪਰਿਵਾਰ ਵੱਲੋਂ 40 ਸੁਖਮਣੀ ਸਾਹਿਬ ਦੇ ਪਾਠ ਹੋਏ ਨੇ ਗ੍ਰੀਮ ਆਸਤਿ ਸੱਚੇ ਪਾਤਸ਼ਾਹ ਜੀ ਉਹ ਬੀਬੀ ਦਲਜਿੰਦਰ ਕੌਰ ਗ੍ਰੀਮ ਆਸਤਿ ਪਾਸ਼ਾ ਜੀ ਉਹਨੂੰ ਵਿਦਿਆਦਾਨ ਵਿਦਿਆਦਾਨ ਬਖਸ਼ਣਾ ਗ੍ਰੀਮਾਸ ਸੱਚੇ ਪਾਸ਼ਾ ਜੀ ਅਤੇ ਦੋਹੇ ਰੋਗ ਸਾਹਿਬ ਬਖਸ਼ਨੀ ਕਿਰਪਾ ਕਰਨੀ ਆਪ ਦੇ ਦਰ ਕੇਸੀ ਚੀਜ਼ ਦਾ ਘਾਟਾ ਨਹੀਂ ਗ੍ਰੀਮਾਸ ਸੱਚੇ ਪਾਸ਼ਾ ਜੀ ਹੋ ਆਈ ਸਾਧ ਦੀਆਂ ਹਾਜ਼ਰੀਆਂ ਲੇਖੇ ਲਾਉਣੀਆਂ ਗ੍ਰੀਮਾਸ ਪਾਸ਼ਾ ਜੀ ਹੋ ਸਭਨਾਂ ਨੂੰ ਆਪਣਾ ਨਾਮ ਜਪਣ ਸਭਨਾਂ ਨੂੰ ਆਪਣੀ ਚਰਨਾਂ ਦੀ ਪ੍ਰੀਤੀ ਬਖਸ਼ਨੀ ਗ੍ਰੀਮਾਸ ਪਾਸ਼ਾ ਜੀ ਹੋ ਆਪਣੇ ਸਰਗਣ ਸਰੂਪ ਦੇ ਪ੍ਰਤੀ ਦਾਦਾਨ ਬਖਸ਼ਣਾ ਸਿੱਖੀ ਸਿੱਖ ਭੋਸੇ ਦੀ ਦਾਦ ਬਖਸ਼ਨੀ ਇਨਾਂ ਬਿਸਰੀ ਨਾ ਵੀ ਬਖਸ਼ ਲੋਰ ਅਖ ਲੋ ਦੇ ਤਰਕੇ ਦੇ ਉਹਦੀ ਦਾ ਆਸ ਸਭ ਗ੍ਰਾਮ ਸਿੰਘ ਨਾਮ ਚੜਦੀ ਵਗਲਾ ਤੇਰੇ ਪਹਾਣੇ ਸਰਬੱਤ ਦਾ ਜੋ ਬੋਲੇ ਸੋਨਿਆ